ਉਹਨੂੰ ਹੰਦਾ ਕਿਵੇਂ ਮਾਰਗ ਪਾਵੇ ਕਰ ਗਏ ਦੇਵ ਉਹੜ ਨਿਭਾਵੇ ਥੋੜਾ ਤਾਂ ਕੈਸੇ ਮਾਰਗ ਪਾਵੇ ਪੂਰੇ ਅੰਦਰੋਂ ਤੋਂ ਹਉਦੀਏ ਪੇਸ਼ ਉਹਨੂੰ ਰੱਸੀ ਲਈਏ ਕੇ ਭੇਜਦੇ ਅਖਾਨਾ ਦਾ ਫਿਰ ਕੋਰ ਕਾਉ ਉਹ ਵੀ ਨਹੀਂ ਆਈ ਦੀ ਫੜ ਗਿਆ ਫੋੜਾ ਉਹ ਤੇ ਉਹ ਸਿੱਧਾ ਆਉਂਦਾ ਤੇ ਪਾਸੇ ਆਪਣਾ ਬੁਖਾਰ ਨੂੰ ਉਹਨੂੰ ਮਜਾ ਰੂਗੀ ਪਤਾ ਬੁਖਾਰ ਜਾਂ ਖਾਦੀ ਨਹੀਂ ਅਸੀਂ ਜਿਆਦੀਆ ਦੱਸਿਆ ਖਾਣਾ ਦੇਖਣ ਲਈ ਉਹ ਦੇਖਣ ਹੈ ਜੀ ਸਮਾਂ ਦਾ ਕੈਸੇ ਬਾਰਿਖ ਬਾਗ ਹੈ ਬਾਗਾਂ ਅਖਰੇ ਉਸੇ ਸ਼ਹਿਰ ਦਾ ਬਿੱਲਾਂ ਦੀਆਂ ਦੀਸ਼ਾਦੀਆਂ ਬਤੀਆਂ ਦੀਆਂ ਦੀਸ਼ਾਦੀਆਂ ਚੌਂਕ ਹੈ ਜਾਊਗਾ ਉਹਲੇ ਕੋ ਬਚਾ ਲੈ ਕੋ ਖਾਣ ਹੈ ਜੀ ਮਾ ਜੀ ਕੁਣ ਸੌਣ ਚ। ਉਹ ਗੇਆਉਂ ਤੇ ਫੜ ਕੇ ਲੈ ਜਾਓ ਜੇ ਜਾਨ ਚਾਹਣ ਹੈ ਉਹ। ਛੱਡੋ ਨਾ ਆਵੇ ਆ ਜਾ ਮੈਂ ਇਹਨੂੰ ਘਰੇ ਖੜੇ ਖਿੜੋ। ਤਾਂ ਗੱਲ ਦੇ ਹੋ। ਉਹਦੀ ਗੱਲ ਤਾਂ ਤਾਲੂਣ ਉਹ ਕੋਈ ਨਾ ਹੱਸਦਾ ਇੰਦਾ ਇੱਥੇ ਤਾਂ ਆ ਤੇ ਮੇਰੀ ਬਾਹ ਫੜ ਲੈ ਤੋ ਤੋੜ ਤਾਂ ਛੱਡੇ ਆ। ਇਹ ਸੰਕਰ ਦੀ ਗੱਲ ਆ ਸੁਣ ਕੇ ਕਰਕੇ ਹੋਗਾ ਸਮਝੇਂ ਨਾ ਇਹ ਤਾਂ ਸਮਝੇ ਕਰ ਚਲੇ ਆ। ਪੇਪਲ ਜਾਨਾ ਫਿਰ ਚਰਪੂ ਲਣਹਾਰ ਉਹ ਲੈ ਚਰਪੂ ਲਣਹਾਰ ਪੇਪਲ ਲੈ ਜਾ ਕਾਈ ਕਰ ਗਏ ਲੋ ਉੜ ਨਿਵਾਵਾ ਕੋਲ ਨਿਵਾਵਾ ਤੋਂ ਟੱਕ ਦਰਵਾਜ਼ਾ ਨਹੀਂ ਵੱਡ ਜਾਂਦਾ ਫਿਰ ਹੱਥ ਫੜ ਕੇ ਰੱਖ ਬਾਹ ਦੇ ਬਾਹ ਦੇ ਬਾਪੀ ਥੁੜਾ ਕਹਾਂ ਪੁਜਾਰੀ ਤੋਂ ਕਹਾਵਿਆਸ ਤਬੂਝੇ ਤੋਰਾ ਤੋ ਰਾਤ ਹੈ ਕਿ ਜ਼ਿੰਦਗੀ ਸਾਰੀ ਉਹ ਕਹਨੇ ਦੱਸੇ ਰੋਤਾ ਦੱਸ ਜਦੋਂ ਰਾਤ ਕਤੇ ਰਾਤ ਹੀ ਹੋਦੀ ਹੈ ਪਰ ਉਸ ਵਕਤ ਤਾਂ ਹੁਣ ਤਾਂ ਕਹਦਾ ਚਾਹਣਾ ਉਹ ਕੁਛ ਹੋਰ ਕਹਿ ਰਹਿਨੇ ਵੀ ਸੁਪਨਾ ਦੇਖਦਣ ਕਰਿਆ ਰਾਤ ਜੇਲ੍ਹਾਂ ਦੀ ਰਾਤ ਬਾਹਰ ਦੀ ਸੇ ਉਹ ਵਾਅਦਾ ਕਰਨਾ ਤੇ ਮਾਂ ਇੰਤਜ਼ਾਰ ਕਰ। ਅਸੀਂ ਉਹ ਦੋ ਵੀਰਾਂ ਕਰਦੇ ਨੇ ਉਹ ਵਾਅਦਾ ਦੇ ਦਿੱਤੀ। ਜਿੱਦ ਦੀ ਗੱਲ ਸੁਲਾਈ ਦੇ ਵਿੱਚ। ਉਹ ਗੱਲ ਦੱਸੀ ਕਰਦੇ ਨੇ ਉਹ ਵਾਅਦਾ ਹੀ ਸਮਝੀ ਜਾਂਦਾ। ਗੱਲ ਗੁਰਬਾਨੀ ਅੰਦਰ ਹੀ ਕਰ ਦਿੱਤੀ ਬਾਹਰ ਲਈ ਅਸਲਾਈਆ ਤੇ ਰੋਈ ਜਾਂਦੇ ਲਾਲਾ ਕੇ। ਜੋ ਪਸੂ ਜੋ ਹੈ। ਤਾਂ ਕਰਕੇ ਦੇਸ ਕਈਏ ਤੋਂ ਸਮਝੇ। ਹੋਰਾ ਉਹ ਰਾਤ ਕੰਨ ਉਹ ਦਿਨ ਸਮਝ ਰਹੇ ਪੋਚਾ ਲੋੜੂ ਬਾਰੇ ਗੱਲ ਨੂੰ ਤਾਂ ਉਹ ਤੋਂ ਹੱਥੇ ਨੂੰ ਥੋੜੇ ਬੰਨ ਲੱਗਦਾ ਵੀ ਥੂੜਾ ਥੂੜ ਜੋ ਕਹਿੰਦੇ ਆਂ ਬਾਹਰ ਵੀ ਹੋਈ ਨਾ ਉਹਨੇ ਅੰਦਰ ਵੀ ਹੋਈ ਹੁੰਦੀ ਹੈ ਕਹਾਂ ਬਿਸ਼ਨਪਦ ਗਾਵੇ ਕੋਣ ਕਾਹਨ ਪੇਸ਼ਰਪਦ ਬਿਸ਼ਨਪਦ ਦਾ ਗਾਉਣਾ ਬਹੁਤ ਅਪਖ ਹੈ ਉਹਦਾ ਰਾਗੀ ਗਾ ਸਕਦਾ ਪੱਕਾ ਸੋਝਿਆ ਹੋਇਆ ਸਦੀਰ ਦਾ ਸ਼ਾਸਤਰੀ ਦਾ ਸਰਦਰ ਕੋਨਰ ਉਹ ਸਦਾ ਬਲ ਨੂੰ ਯਾਦਦਾ ਸਾਹ ਪਿਛਲਪਦ ਭਾਵਨ ਦਰਬੀ ਕੋ ਇਹ ਸੇ ਤਾਂ ਪਿਛਲਪਦ ਆਖ ਕਹੇ ਕਰੇ ਤੋ ਵੀ ਜ਼ੁਰਪੰਗ ਜਦਨ ਕਰੇ ਤੋ ਵੀ ਸੁਣ ਕਲਦਾ ਫਿਰ ਵੀ ਪੰਗ ਹੋ ਜਾਂਦੀ ਹੈ ਸਰਦਰੀ ਕਾ ਸਕਦਾ ਵਾਰ ਦੇ ਪੀਸ ਹੋਰੇ ਕਬੀਨੈਟੇ ਹੀ ਬੋਲਣ ਲੱਗੇ ਸੀ ਸੋ ਕਰ ਜਾਂਦੀ ਬਾਣੀ ਵੀ ਪਾਜਰ ਨਾਲ ਟਾਲ ਬੰਨ ਨਹੀਂ ਜਾ ਸਕ ਜਾਂਦੀ ਹੈ। ਕ੍ਰੋਸ ਕਰਦੇ ਦੇਖ ਤੂੰ। ਆਹ ਕਰਿਆਂ ਤੇ ਗੱਡੀ ਹੋ ਜਾਂਦੀ ਹੈ ਸੁਰਦ। ਮਾਨਾ ਜਾਂਦੀ ਕਸੋਦੀ ਹੈ। ਖੜਿਆ ਦਿੰਦੇ ਲੋਏ ਕਿ ਤੈਂ ਕਿ ਪਰਬਤ ਪਰ ਪਹੁੰਚ ਨਹੀਂ ਹੋ ਤਾ ਉਹ ਉਸ ਗਬਰ ਤੇ ਟੱਟਾ ਫਿਰ ਗਿਆ ਚੜਨ ਵਾਲਾ ਪਹੁੰਚਣਾ ਨਹੀਂ ਆਇਆ ਦੱਸ ਸਰਪਹਾੜ ਤੇ ਉੱਥੇ ਜਾਵੇ ਜਾ ਕੇ ਲੈ ਜਾ ਤਾਂ ਉਹ ਜਾਊਗਾ ਉਹ ਉੱਥੋਂ ਤਾਂ ਥੱਲੇ ਰੁੜ ਕੇ ਆ ਜਾਂਦਾ ਚਲੋ ਜੇ ਉੱਥੋਂ ਥੱਲੇ ਰੋੜੋ ਅਵੇ ਬੇਟਾ ਫਿਰ ਆ ਜਾਂਦਾ ਛੱਲੇ ਜਨਮਰ ਜੀ ਆ ਜਵੇ ਪਰ ਉੱਤਰ ਉਹ ਰੋਣਾ ਉਹ ਘਰ ਥੱਲੇ ਲੋਰਦਾ ਬੜਾ ਬੜਾ ਪਾਣੀ ਨੂੰ ਤੇ ਲਾਹਾਂਨ ਥੱਲੇ ਕੋਨ ਅਰਖਵਾ ਤੋਂ ਚਲੇ ਜਾਂਦਾ ਆਪਣੇ ਆਪੇ ਆਪਣੇ ਆਪੇ ਉੱਤੋਂ ਥੱਲੇ ਨੂੰ ਜਾਣਾ ਉੱਤੇ ਨੂੰ ਜਾ ਤੇ ਚੱਲ ਪਰ ਤੋਂ ਇਹ ਦੋਏ ਗੱਲਾਂ ਦਾ ਫਰਕ ਹੈ ਚਲਦਾ ਥੱਲੇ ਘਰ ਕਵਾ ਤੋਂ ਤੁਰੇ ਜਾਏਗਾ ਨਾ ਇਹਨਾਂ ਤੋਂ ਵੀ ਜਾਣਾ ਪਾਣੀਆਂ ਬੈਠ ਰਹਿੰਦੇ ਹੁੰਦੇ ਰੋਣ ਤੋਂ ਜੇ ਉਹ ਟਾਂਕੀ ਚਾਉਣਾ ਫਿਰ ਤਾਂ ਫੋਰਸ ਨਾਲ ਚੱਲਦਾ ਇਹ ਤਾਂ ਫੋਰਸ ਨਾਲ ਚੱਲਦਾ ਕਦੇ ਹਾਂ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਕਿਰਪਾ ਕਿਰਪਾ ਕਰੇ ਮੈਂ ਦੀਨ ਬੇਨਤੀ ਕਰਦਾ ਹੈ ਕਰਤਾਰ ਕਰਨਾ ਉਹ ਕਰਣੋਂ ਦਾ ਸਿਰਫ ਕਰਨ ਵਾਲੇ ਨਹੀਂ ਕਰਨਾ ਮੈਂ ਤਾਂ ਜੀ ਬੜਾ ਤਾਂ ਸਾਬੇ ਦਰਬدل ਦਰਬدل ਜਿਹੜਾ ਦਿਲ ਹੈ ਕੋਮਲ ਦਿਲ ਕਰੂਰ ਦਾ ਭਰਿਆ ਹੋਇਆ ਰਹਿਮ ਦਾ ਭਰਿਆ ਹੋਇਆ ਦੀਰ ਮਰਤੀ ਕਰੇ ਕਦੀ ਤੇਰੇ ਸਾਹਮਣੇ ਕਿਰਤੀ ਕਰਦਾ ਹਾਂ ਤੇਰੀ ਕਿਰਪਾ ਦੇ ਬਿਨਾਂ ਮੈਂ ਦਾਤਾ ਨਹੀਂ ਚੱਲਦਾ ਮੇਥੋਂ ਤਾਂ ਦਾਰੂ ਫਰੋੜੀ ਤੋਕਾਰ ਬੇਦਬਾਹ ਗੱਲ ਕਰਦਾ ਫਤਿਹ ਹਰਤੇ ਸਰੰਦਰ ਹੋ ਤੈਨੂੰ ਕਬੂਦ ਕਮ ਨਾਣ ਦਾ ਦਾ ਰੀਟਰ ਪਾਉਣ ਨੂੰ ਤਰੂਗਾ ਜੇਰਾ ਭਾਈ ਜੀ ਨੇ ਦੌੜਨ ਜੋਰ ਆ ਆਪਾਂ ਕਰਦਾ ਜੋਗੀ ਹੈ ਕੋਈ ਹੋਰ ਹੈ ਬਾੜਾ ਵਾਲਾ ਉਹ ਮਰਦਾ ਪਰਵਾਹੀ ਗੱਲ ਹੈ ਬੰਦਾ ਇੱਥੇ ਜਾਇਜ਼ ਪੈ ਇੱਥੇ ਖੜਾ ਹੋਂ ਪਤਾ ਕਿ ਜਾਇਜ਼ ਪੜ ਜਾਣਾ ਕਹੇ ਤੇ ਸਾਡੀ ਭੂਕ ਮਾਰ ਕੇ ਬੈਠਾ ਰ ਆ ਜਾਂਦਾ ਉਹ ਕਰਨ ਨੂੰ ਵੀ ਲੋੜ ਪਈ ਖੁਦ ਨੂੰ ਜਵਾਜ਼ਾ ਵੀ ਆ ਜਾਂਦਾ ਹੁੰਦਾ ਹੈ ਉਹ ਤੇ ਤੇ ਚੁੱਪ ਕਰ ਇੱਥੇ ਬੈਠਾ ਰਹੇ ਸੁਬਾਨ ਕਿਰਪਾ ਕਰਦਾ ਹੈ ਮਤੂ ਕੋਈ ਕਿਰਪਾ ਕਰਦਾ ਹੈ ਲੋਕ ਤੁਸੀਂ ਬਾਲੀ ਆਉਗੀ ਉਹ ਹੀ ਦਰਦ ਕੋਈ ਸ਼ਬਦ ਸੁਬਾਵਾ ਉਹ ਸ਼ਬਦ ਦੇ ਸੁਬਾਵਾ ਕਰ ਚਲਾਇਆ ਸੋਤਰੀ ਜਾਣਾ ਸੋ ਧਿਆਨ ਨਾਲ ਜਦ ਧਿਆਨ ਜੋ ਤੇ ਜੀਵ ਉੱਤੇ ਖੜੇ ਰਹੇ ਜਿੱਥੇ ਧਿਆਨ ਉਹਦਾ ਚੋੜ ਚੇਤਨਪਰ ਦੀ ਗੱਲ ਆ ਤੇ ਆ ਪਰ ਤੇ ਆਮ ਚਰਚਾ ਹੋ ਗਈ ਉਠਾ ਲੋ ਅਮੇ ਜੀ ਨੇ ਜਦੋਂ ਪਰ ਇਹ ਐ ਜੋ ਬੋਲਦੇ ਨੇ ਜੋ ਪਿੱਛੇ ਅਮੀਨ ਦੇਖ ਕੇ ਗੱਲਾਂ ਕਹਿ ਜਾਂਦੀ ਉਹਦੇ ਇਸ ਕਰਕੇ ਇਹ ਦੇਖਿਆ ਉਹਨਾਂ ਨੇ ਜਿੱਦਾਂ ਜਦਾ ਸੀ ਆਪ ਨੇ ਦੇਖ ਲੇਤੀ ਨਾ ਇਹ ਸਭ ਜਦ ਦੇ ਨਾਲ ਨੂੰ ਬੁਰਮੂ ਕੀ ਦੇਖੋ ਸਾਰੇ ਲੋਕ ਉਹਨੇ ਦੇਖਿਆ ਦੱਸਿਆ ਅਸੀਂ ਉਹੀ ਦੇਖਣ ਨੂੰ ਬੁਰਮੂ ਕਹ ਰਿਹਾ ਨੇ ਦੇਖੜੇ ਫਿਰ ਦੱਸਦਾ ਤਾਂ ਵਿਚੋ ਕੋਈ ਭੇਜ ਨਹੀਂ ਜੜੇ ਉਹ ਪਤਾ ਲੱਗਦਾ ਆ ਗੱਲ ਉਸ ਵੇਲੇ ਦਾ ਇਤਿਹਾਸਾ ਉਸ ਵੇਲੇ ਦਾ ਉਹ ਹੱਦ ਵਿੱਚ ਸੀ ਨਾ ਬਹੁਤ ਸਾਡੀ ਉਹ ਦੇਖੇ ਗੱਲ ਚੱਲਦੀ ਸੀ ਜਾਂ ਹਾਂ ਜੀ ਉਹ ਜਦੋਂ ਹੋਰ ਆ ਜਾਂਦੀ ਹੈ ਜਦੋਂ ਗਲਤੀ ਕਰਦੀ ਹੈ ਨਾ ਕੋਈ ਪਾਣੀ ਤੇ ਕੋਈ ਹੁਣ ਰਬਦਾਸ ਕਹਿੰਦਾ ਜਨਮਤਵਾਰੇ ਦੇ ਦੋ ਗੱਲ ਹੋਤਾ ਕਿਸੇ ਦੀ ਕਹਾਣੀ ਮੈਂ ਤੁਹਾਨੂੰ ਇਹ ਦੱਸੂਗੀ ਕਿ ਜਦੋਂ ਆਪਣੇ ਕੋਈ ਆਉਂਦੇ ਕਹਿੰਦੇ ਗੱਲਾਂ ਜਿਆਦਾ ਪਹਿਲਾਂ ਵੀ ਹੋਰ ਕਹਿ ਬੈਠੇ ਉਹਦੇ ਆਂ ਚੱਲੋ ਪਰ ਕਹ ਉਹ ਗੱਲ ਕਿਸੇ ਜੁਬਦੀ ਕਹੀ ਜਿਹੜੀ ਉਹ ਕਹਿ ਬੈਠਿਆ ਤੇਰ ਮੈਂ ਜਾਵਾਂ ਚਾਹ ਰਾਕਤੀ ਗਿਆ ਕਾਇ ਵਖਿਆ ਜੇ ਗੱਲ ਨਾ ਕਹੇ ਨਾ ਸੱਚ ਜਵਾਬ ਦੇ ਲੋ ਖੋ ਰੇ ਨਾ ਉਪੜੀ ਉੜਦੀ ਸੁਰਾਸ ਵੀ ਯੋਨਾ ਸਰੀਰ ਤਾਂ ਜਿਉਂ ਚਾਹੁੰਦਾ ਸੀ ਉਹਨੇ ਹੋਰ ਤਰੀਕਾ ਨਾ ਕਹਾ ਬਾਬਾ ਆਪਣਾ ਬਸਨ ਸੁਗਾਉਂ ਉਹ ਕਹਿੰਦਾ ਜਿਸ ਕਾਲ ਨਾਲ ਤੁਮਹਾਰਾ ਤੇ ਸੋਧ ਕਾਜ ਹੁੰਦਾ ਸਹੀਏ ਉਹ ਐ ਤਰੀਕੇ ਨਾਲ ਜਾਇਆ ਜੇੜੇ ਕਾਲ ਤੇ ਜਿਹੜੀ ਗੱਲ ਬਾਤ ਤੇ ਜਿਹੜੀ ਰਹਿਣਾ ਕੀਤੀ ਰੁਖਤਾ ਜਾਓ ਕਿ ਮੈਂ ਉਹ ਸੰਧ ਹੂੰ ਭਗਵਾ ਸ੍ਰੀ ਹਿਤਾਜ ਅਭਿਜਿਤ ਕੀ ਜਿਵੇਂ ਰਹਾ ਬੜਾ ਔਖਾ ਜੀਵਨ ਸੀ ਉਹਦਾ ਕੰਮ ਹੋ ਗਿਆ ਰੋਟੀ ਖਾਂਣ ਕੋਈ ਨਹੀਂ ਸੀ ਪਰ ਚਾਰ ਕਾ ਬੁਰ ਮਤਲਬ ਚੱਲ ਵੀ ਗਈ ਕਰਦੇ ਬਿਲਕੁਲ ਬਹੁਤ ਰੁਕੀਆ ਉਹਦੇ ਇਬਦੀ ਬਿੱਟੀ ਕਹਿੰਦੀ ਸੀ ਜੀ ਜੀ ਬੋਲਦੀ ਤੇ ਉਹ ਕਾ ਵੀ ਮਰ ਜੇ ਲੈਣਾ ਤਰ੍ਹਾਂ ਮਾ ਉਹ ਪਹਿਲਾਂ ਮਰਨ ਕਬੂਲ ਕਰਦੀ ਸੇ ਤੁਝ ਵਿੱਚ ਕਹਿ ਗਿਆ ਉਹ ਉਹ ਕਹਿੰਦਾ ਕਿ ਸਰੀਰ ਤੇ ਚੱਕਰ ਛੱਡ ਪਰ ਕੀ ਇਹ ਤੇ ਕਰਨਾ ਆਪਣਾ ਨਾਮ ਤੋਂ ਆਪਣਾ ਦਰਦ ਜੇ ਚੱਲ ਛੁੱਟੀ ਹੋਵੇ ਕਿੰਨੇ ਘੜੀਏ ਉਹ ਤਿਆਰੀਆਂ ਨੂੰ ਕੀਆ ਉਹ ਲਾਉਗਾ ਵੀ ਯਾਰ ਕਿਹਨੇ ਉਹ ਕਿਹੜਾ ਉਹਨੇ ਤਾਂ ਪੰਜ ਵਜੇ ਤਾਂ ਛੁੱਟੀ ਹੋਵੇ ਉਹਨੇ ਤਾਂ 13 ਬਾਕੀ ਨਾਲ ਵੀ ਜਾਇਦਾ ਯਾਰ ਬਾਕੀ ਨਾਲ ਹੀ ਜਾਂਦਾ ਉਹ ਬਾਹਰ ਜਿਹੜੇ ਕੰਮ ਕਰਦਾ ਜਿੱਥੇ ਕੱਤਰ ਮੈਂ ਕੰਮ ਕਰਦਾ ਸਾਡੇ ਕੋਲ ਮਿਲ ਗਿਆ ਬੱਚੇ ਨੂੰ। ਬਾਸੋਂ ਰੋਨ ਸਕੂਲ ਦਾ ਰੁਕੀ ਜਾਂਦਾ। ਉਹਨੂੰ ਚਾਹੁੰਦਾ ਲੀਏ ਦੀ ਗੱਲ ਦਾ। ਪਰ ਮਾਣ ਘੜਾ ਰਖਾ ਗਿਆ। ਅਗਲਾ ਪ੍ਰੋਗਰਾਮ ਦੇਖੋ। ਜਿਹੜੇ ਕੰਮ ਖਾਤਰ ਇੰਨੀ ਪੜਾਈ ਕੀਤੀ ਹੈ। ਉਧਰ ਜਾਂਦਾ ਹੋ ਸਕੂਲ ਵਾਲੋ ਤਾਂ ਜੋ ਰਕੀ ਬਣੂਗਾ। ਜਾ ਕਾਰਨ ਹਮ ਤੋਂ ਗਿਆ ਭੱਜਣ ਤੋਂ ਕੱਟ ਸੋ ਜੋ ਕਾਜੂ ਲੱਗਿਆ ਜੇ ਕੋਲ ਸਾਢੀ ਕੋਟਲੀ ਉਹ ਛੇ ਗਰੀਬੀ ਨੂੰ ਮਰਨਾ ਹਿੰਦ ਫੇਰ ਜਦ ਹੋ ਗਿਆ ਨਾ ਹੁਕਮ ਹੋਇਆ ਉਹਨਾਂ ਨੇ ਹੋਲ ਗਈ ਨਾ ਮੇਰਾ ਸਾਰੇ ਗੱਲੇ ਹੈ ਭਈ ਅਜਾ ਜਾਣਨ ਦਾ ਹਾਲ ਤਾਂ ਤੈਨੂੰ ਜਾਣੂ ਹੋਊ ਅਸੀਂ ਆਪਣਾ ਕੰਮ ਬਣਾਣੇ ਸਕੇ ਅਸੀਂ ਜਿਹੜਾ ਤੇਰੇ ਖਾਤਰ ਕੀਤਾ ਇਹਨਾਂ ਕੁਝ ਜਿਹੜਾ ਤੋ ਖਜ਼ੂਰ ਕੀਤਾ ਆਜ਼ਾਦਾਂ ਕੰਮ ਕਰ ਤਾਂ ਹੋ ਮੈਂ ਵੀ ਜਾਣਾ ਤੁਹਾਡੇ ਕੋਲ ਮੈਂ ਤੂੰ ਹੋਪਾ ਵਾਇਆ ਯੋਮ ਦਾ ਬੈਂਦੀ ਸੀ ਜਿਹੜਾ ਚਾਹੁੰਦਾ ਮੰਗਰੋਂ ਮਤਸਾ ਅੰਦਰ ਦੀ ਗਰੇੜੀ ਰਈਏ ਉਗੜੀ ਜੋ ਜਾਣਾ ਹੈ ਬੰਨਾ ਕਮ ਜਾਵੇ ਗੱਲਾਂ ਦੀਆਂ ਚਬਰਟੀਆਂ ਫਿਰ ਕਹਿੰਦਾ ਇਹ ਬਰੇੜੀ ਦੀ ਬਰਦਾ ਸਵਾਤੀ ਗੱਤਾਲੀ ਇਹ ਗੱਲਾਂ ਤੋਂ ਕੋਈ ਕਰਤਾ ਸਵਾਲ ਕੀ ਜਵਾਬ ਦਿੱਤਾ ਸੀ ਇਹਨਾਂ ਦੱਸ ਪਾਚਾ ਨੇ ਜਿਹੜਾ ਕਿਹਾ ਸੂਤ ਸਰਾਇ ਖਤੇ ਤੇ ਉਹਨਾਂ ਕੀ ਕਹਿੰਦੇ ਜਵਾਬ ਦਿੱਤੀ ਕੁਝ ਉਹ ਹਾਲ ਦਾ ਬਿਚੂ ਸੀ ਅਭਿਆਨ ਨਹੀਂ ਆਉਂਦਾ ਰੋਜ਼ ਰੋਹਾਲਾਂ ਦੇ ਕਿਉਂ ਦਾ ਕਿਉਂ ਦਾ ਨਹੀਂ ਹਾਲਾਤਾਂ ਸਾਹਮਣੇ ਉਹਨਾਂ ਨੂੰ ਨਹੀਂ ਕੋਈ ਹਾਲਾਤਾਂ ਸਾਹਮਣੇ ਉਹਨਾਂ ਨੂੰ ਦੁਨੀਆ ਮਤਾਂ ਸਾਡੇ ਖਿਲਾਫ ਨਹੀਂ ਜਦੋਂ ਦੇ ਸੀ ਖਿਲਾਫ ਉਹਨਾਂ ਦੇ ਜਿਹੜੇ ਉਹਨੇ ਸੀ ਸਾਡੇ ਦੇ ਚਿਪੜੀਆਂ ਉਹਦੇ ਪਛਾਹ ਵਾਸਤੇ ਵੀ ਗੱਲਾਂ ਕਰੀਆਂ ਹੁੰਦੀਆਂ ਅਗਰ ਨਹੀਂ ਜਾਂਦੇ ਤਾਂ ਸਾਡੇ ਸਾਹਮਣੇ ਮਾਣੇ ਗੋਲ ਮਾਣੇ ਗੋਲ ਕਾ ਜੀ ਨਹੀਂ ਗੱਲ ਆ ਰਹੀ ਅਰਦਾਸ ਹੈ ਬੰਦਾ ਕਹਿੰਦਾ ਫੇ ਚੁੱਪੇ ਲਰ ਗਿਆ ਹਦਿਏ ਉਹਨ ਕੀ ਨਾਖ ਨਹੀਂ ਫਿਰਦਾ ਦੌਰ ਨੂੰ ਫਦਾਈ ਸੀ ਸਾਰ ਤੇਰੇ ਖਾਸਲ ਜਉਦਾ ਆਪਣੇ ਵਾਸਤੇ ਨਹੀਂ ਜਉਦਾ ਕਰ ਲੈ ਦਸ ਜੂੜੀ ਉਹ ਕੰਮ ਵੀ ਤਾਂ ਠੀਕ ਹੈ ਡੈਡੀ ਦਾ ਵੀ ਪੂਰੀ ਹੋ ਗਈ ਪਰ ਹੋਟਲ ਪ੍ਰੋਬਲਮ ਹੈ ਤੇ ਸਰਪੰਚ ਜੀ ਨੇ ਕਿਹਾ ਤਾਂ ਪੈਸੇ ਨਾ ਨਾਮ ਦਿੱਤਾ ਨੂੰ ਰੋਟੀ ਮੰਗਦਾ ਦੇਣੀ ਹੈ ਰਾਜ ਮਰੇ ਵਿਚੇ ਜਿਵੇਂ ਆਉਂਦੇ ਐ ਪੀ ਇਹ ਕਹਿਣ ਦੀ ਕਿ ਹੈ ਨਹੀਂ ਹੈਗੀ ਚੱਕਲਾ ਦਾ ਅਸੀਂ ਉਹਨੂੰ ਉਹਦਾ ਬਰੋਦਾ ਉਹਦਾ ਉਹਦਾ ਨਾ ਮਾਲਕੀ ਬਾਰੇ ਗੱਲ ਕਰਦਾ ਕੋਈ ਹੋਰ ਵੀ ਨਾ ਪਰਦਾ ਜਬ ਹੋਗੀ ਕੋਈ ਹੋ ਰਿਹਾ ਨਿਕਲ ਉਹ ਚੁੱਪ ਚਾਹ ਜੇ ਨਾ ਉਹਦੀ ਤੇ ਬੋਲ ਆਜਾ ਬਹਾਰਾਂ ਲਈ ਬੜੇ ਬੜੇ ਸੰਤਾਂ ਦੀ ਮਤਬੋਰੀ ਜਾਣੀ ਹੈ ਇਹ ਤੇ ਲੋਕੀ ਬੱਤ ਕਰਦਾ ਹੈ ਉਸ ਬੇੜੇ ਦਾ ਦਰਸ਼ਨ ਹੋ ਰਿਹਾ ਕੀ ਹਾਲਾਤ ਹੈ ਕਿੱਥੇ ਖੜਾ ਕੀ ਗੱਲ ਆਪੋ ਜੀ ਸਿੱਖੀ ਕਹਿੰਦੀ ਹੈ ਉਹਦੀ ਪੋਜੀਸ਼ਨ ਕੀ ਹੈ ਇਹ ਗੱਲ ਕਿਉਂ ਕਹੀ ਇਹ ਦਰਸ਼ਨ ਨਹੀਂ ਦਰਸ਼ਨ ਕਰਦੇ ਨਾਲ ਕੁੁਰੂਕੀ ਦੇਖਦਾ ਹੈ ਜਦੋਂ ਆਪਰੇ ਤੇ ਖੁਦ ਹੋਵੇ ਦੇਖ ਦਿਖਾਈ ਜੇ ਤੱਕ ਇਹੋ ਜਿਹਾ ਖਾਸ ਨਾ ਹੋਸ ਮੈਂ ਜੇ ਦੇਖ ਲੈ ਮਾਣ ਨੂੰ ਜਬੰਦ ਰਾਜੂ ਕੋ ਤੇ ਇਹ ਜਰਾਤ ਕੋ ਅੱਖਾਂ ਦੇਖੂਗਾ ਉਹ ਵੀ ਏਥੇ ਵੀ ਦੇਖੂਗਾ ਕੌਣ ਅੱਖਾਂ ਵਾਲੇ ਦੇਖੂਗਾ ਕੌਣ ਕੌਣ ਉਹ ਬਿਆਨ ਕੀਆ ਹੋਣ ਤਾਂ ਦਰਸ਼ਕ ਦੇ ਘਬਰਾ ਨਹੀਂ ਆਉਣਾ ਹੈ ਪਹਿਲਾਂ ਸ਼ੁਰੂ ਜਿੱਦਿਆ ਕਰਦਾ ਹਾਂ ਉਹ ਤਾਂ ਲੱਗਦਾ ਪਹਿਲਾਂ ਬਰੋੜੀ ਜਾਂ ਤਾਂ ਸੋਚਦਾ ਲੱਗਦਾ ਇਹ ਗੱਲ ਵੀ ਕਰਦੇ ਉਹ ਤੇ ਇਹੋ ਵੀ ਹੈ ਕੋਈ ਸਾਜ਼ਾ ਜਦੋਂ ਹੁੰਦਾ ਹੁੰਦਾ ਹੁੰਦਾ ਆਪਾਂ ਦੇਖਣਾ ਵਰਸਦੇ ਆ ਪਰ ਅਰਿਆ ਦਾ ਵਿਸ਼ਵਾਸ ਨਹੀਂ ਕਰਦੇ ਫਿਰ ਕਰਨ ਲੱਗ ਜਾਂਦੇ ਫਿਰ ਲੱਖਾਂ ਤੇ ਕਰੋੜਾਂ ਤੱਕ ਵਿਸ਼ਵਾਸ ਹੋ ਜਾਂਦਾ ਵਿਸ਼ਵਾਸ ਹੈ ਜੇ ਪੜ੍ਹਿਆ ਰਹੇ ਨਾ ਹੋਏ ਤਾਂ ਵੀ ਦਾਤ ਮਗਰੀ ਨੂੰ ਤਾਂ ਜਿਹਾ ਜਿਹਾ ਹੈ ਇਹ ਵਿਸ਼ਵਾਸ ਗੁਰਮੱਥੇ ਵੀ ਹੁੰਦਾ ਆ ਜਾਂਦਾ ਹੈ ਪ੍ਰਤੱਖ ਹੁੰਦੀ ਜਾਂਦੀ ਹੈਗਾ ਨਾ ਤਾਂ ਵਿਸ਼ਵਾਸ ਹੁੰਦਾ ਹੈ ਹਾਂ ਐਵੇਂ ਨਹੀਂ ਮਨ ਦਾ ਹੈ ਪ੍ਰਤੱਖ ਹੁੰਦਾ ਜਾਂਦਾ ਪ੍ਰਤੱਖ ਸਭ ਕੁਝ ਤਾਂ ਮੰਨਦਾ ਪਤਾ ਖੈ ਦੀ ਕੋਈ ਅਫਰ ਬਲ ਉਹ ਪਤਾ ਖੈ ਦੀ ਦਾ ਕੋਈ ਬਜ਼ਾਰ ਚ ਕਦੇ ਕਦੇ ਕੋਈ ਨਾ ਬਿਆਰੇ ਬੋਲ ਰਹੇ ਹੁਣ ਅਸੀਂ ਸਭ ਹਾਂਜੀ ਸਰਤਾਰ ਕਰਨਾ ਮੈਂ ਦੀਰ ਬੇਨਤੀ ਕਰੇ ਸਰਤਾਰ ਕਰਨਾ ਮੈਂ ਦੀਰ ਬੇਨਤੀ ਕਰੇ ਜਨਾਬ